ਸ਼ਲੋਕ ਮਹੱਲਾ ਚੌਥਾ ਮਲਮੀ ਭਰਿਆ ਨੀਲਾ ਕਾਲਾ ਖਿਦੋਲੜਾ ਵੇ ਮੁਖੇ ਨੂੰ ਪਾਇਆ ਪਾਸ ਦੇ ਹਾਂਜੀ ਕੋਈ ਬਹਿਣ ਜਗਤ ਮੈਂ ਗੁਹੂ ਪੜ ਸੰਗਵੀ ਮਲ ਲਾਏ ਮਨਮੁਖ ਆਇਆ ਠੀਕ ਹੈ ਜੀ ਇਹ ਕੋਰੀ ਨੇ ਅਕੋਰੀ ਦੇ ਨਜ਼ਰੂ ਅੱਛਾ ਜੀ ਇਹ ਭੈਣ ਇਹਨਾਂ ਕੋਈ ਚੀਜ਼ ਕਿਤੇ ਨਾ ਕਿਤੇ ਸਰੀਰ ਚ ਲਾ ਕੇ ਰੱਖਦੇ ਨੇ ਅੱਛਾ ਜੀ ਘਰ ਰੱਖੜ ਜਾਏ ਕੋਫਤ ਰੱਖੜ ਇਹ ਲੈ ਕੇ ਤਾਂ ਸਾਡਾ ਸੁੱਤੀ ਗੱਲਾਂ ਨੇ ਅੱਛਾ ਜੀ ਮੇਰੀ ਜਾਣ ਜਾਣ ਹੁੰਦੇ ਨੇ ਅਸਲ ਵਿੱਚ ਕੋਈ ਨਾ ਹੋਰ ਗੁਰੂ ਹੁੰਦਾ ਏਜੰਟ ਹੁੰਦੇ ਨੇ ਉਹਦੇ ਉਹ ਤੇ ਤੰਗ ਲੈਣ ਵਾਸਤੇ ਲੋਕਾਂ ਨੂੰ ਇਹ ਲੱਗਦਾ ਵੀ ਇਹ ਤਾਂ ਕੋਈ ਬੜਾ ਭਗਤ ਹੈ ਯਾਰ ਕਰਦੇ ਤੌਰ ਤੇ ਹੂੰ ਹੂੰ ਜੋ ਬੋਝ ਦੀ ਪਰਦੇ ਆਪੋ ਹੈ ਅੱਛਾ ਭਰਿਆ ਹੋਇਆ ਉਹ ਲੈ ਕੇ ਹਾ ਬੇਮੁਖਾ ਲੋ ਹਾ ਬੇਮੁਖੇ ਬੇਮੁਖੇ ਗਵਾਹਾਂ ਮੁਖ ਦਾ ਚਾਹੀਦਾ ਉਹਦੀ ਬੇਮੁਖਾ ਹੀ ਚਾਹੀਦਾ ਮਨ ਮੁਖ ਪਰਿਆ ਜੀ ਮਨ ਮੁਖ ਕਬਜ਼ ਕਮ ਆਪਣੇ ਮਗਰ ਤੋਂ ਬੇਮੁਖਾ ਇਹ ਜੂਈ ਦਾ ਮਤਲਬ ਕੀ ਹੈ ਵੀ ਮਾਲ ਭਰਿਆ ਜੂਆਂ ਦਾ ਭਰਿਆ ਹੋਇਆ ਜੀ ਹਾਂ ਜੂਏ ਦਾ ਭਰਿਆ ਹੈ ਅੱਛਾ ਜੀ ਹਾਂ ਕਦੋਂ ਬਲੀਨ ਲੋਗਾਂ ਦਾ ਜੂਆ ਦਾ ਠੀਕ ਹੈ ਜੀ ਮਾਲ ਜੂ ਹੀ ਭਰਿਆ ਨੀਲਾ ਕਾਲਾ ਖਿਦੋ ਲੜਾ ਤਿੰਨ ਬੇਮੁਖ ਮੁੱਖਿਆਂ ਨੂੰ ਪਾਇਆ ਆਇਆ ਹਾਂਜੀ ਉਹਦੇ ਪਾਤਾ ਚੋੜਾ ਅੱਛਾ ਜੀ 200 ਰੁਪਏ ਦੇ ਡੇ ਬੈਠਲ ਦਿੱਤਾ ਹੂੰ ਹਾਂ ਸਰਦਈ ਕੋਈ ਬਹਣ ਹਾਂਜੀ ਠਾਕਰੇ ਠੀਕ ਬੈਠਣ ਦਿੱਤਾ ਉਹ ਪੜ ਸੱਭੀ ਬਰਲਮੁਕ ਆਇਆ ਹੂੰ ਹੂੰ ਸੈਕਿੰਡ ਵੀ ਆ ਕੇ ਸਲਾਮੂਦੂ ਲਾ ਕੇ ਆਇਆ ਹੈ ਉਹ ਜਿਵੇਂ ਐ ਲੱਗਦਾ ਉਹ ਵੀ ਖਾ ਕੇ ਆਇਆ ਹੈ ਅੱਛਾ ਜੀ ਕਿਆ ਕੋਈ ਚੀਜ਼ ਨਹੀਂ ਖਾਂਦਾ ਜਿਹੜਾ ਕਰਦਾ ਉਹ ਖਾ ਲੱਗਦਾ ਅੱਛਾ ਬੜਾ ਭਗਤ ਹੂੰ ਹੂੰ ਬੜਾ ਭਗਤ ਕਰਦੇ ਨੇ ਉਹ ਅੱਛਾ ਜੀ ਕਿ ਯਾਰ ਕੁਛ ਕਰਦਾ ਹੈ ਅਸਲ ਵਿੱਚ ਕੁਛ ਹੈ ਫਾਸ ਪ੍ਰਾਈ ਜੋ ਟਟਲੀ ਨੂੰ ਬੇਨੁੱਕ ਅਸਲ ਤੇ ਭੇਜਿਆ ਅਸਲ ਤੇ ਭੇਜਿਆ ਕਿਉਂ ਇਹ ਤੇ ਗੁਰੂ ਘਰ ਦੇ ਸ਼ਰੀਰ ਦੇ ਭੇਜਿਆ ਪ੍ਰਾਈ ਦਿੱਤਾ ਸੀ ਸਿੱਧੇ ਕਰਦੇ ਐ ਜੇ ਲੋਕਾਂ ਤੋਂ ਕਰਾਉਂਦੇ ਅੱਛਾ ਜੀ ਰਾਈ ਜੋ ਨਿੰਦਾ ਚੁਗਲੀ ਕੋ ਵੇਮੁਖ ਕਰਕੇ ਭੇਜਿਆ ਸਾਹ ਪੁੱਤਲੇ ਕੱਪੜੇ ਪਾਉਦੇ ਸੀ ਹਾਂਜੀ ਸਾਹ ਸੁਤਰਾ ਤੇ ਉਹਦੇ ਖੇਡੀ ਕਰਦਾ ਸੀ ਕਰਦਾ ਸੀ ਠੀਕ ਹੈ ਜੀ ਰਾਈ ਜੋ ਚੁਗਲੀ ਦੋ ਵੇਮੁਖ ਕਰਕੇ ਭੇਜਿਆ ਤੇ ਗਿਆ ਕਰਕੇ ਅੱਛਾ ਕੇ ਜੇਬੇ ਰਾਸੀ ਪੜਾਉਂਦੇ ਤੇ ਹੂੰ ਹੂੰ ਰਾਸੀ ਬੁਰੂ ਘਰ ਦੇ ਵਿਰੋਧ ਚ ਖੜੇ ਕਰਦੇ ਤੇ ਜੀ ਕਹਿੰਦੇ ਹਾਂਜੀ ਹਾਂਜੀ ਇਹ ਤਾਂ ਤੁਹਾਡੇ ਕਰਕੇ ਹੀ ਐ ਕਾਲੀ ਬੋਲ ਕੋ ਸੀ ਨਾ ਵੀ ਮੂੰਹ ਕਾਲਾ ਦੋਹਾ ਵਿਮੁਖਾਂ ਦਾ ਕਰਾਇਆ ਉੱਥੇ ਦਾ ਕਾਲਾ ਆ ਜਿਹਨੇ ਭੇਜਿਆ ਉਹ ਉਹਦਾ ਬੇਵੁਖਾਲਾ ਹੋਇਆ ਠੀਕ ਹੈ ਜੀ ਜਿਹੜਾ ਬੋਲ ਖੋ ਬੋਲਿਆ ਉਹਦਾ ਵੀ ਬੁਖਾਣਾ ਹੋਇਆ ਹਮਮ ਸਰ ਉਹਦੀ ਗੱਲ ਤੇ ਸ਼ੁਰੂ ਕਰੀ ਗੁਰੂ ਜੀ ਅੱਥਿਆ ਗੁਰੂ ਕਰਦੀ ਤਾਂ ਪੁੱਛਿਆ ਪਤਾ ਵੀ ਲੱਗ ਗਿਆ ਕਿ ਕਿਹਦੇ ਦਰਵਾਇਆ ਹੈ ਹੋਇਆ ਠੀਕ ਹੈ ਜੀ ਅ ਸਾਬਤ ਜਗਤ ਵਿੱਚ ਜਦੋਂ ਝਾੜਾ ਪਈ ਉਹਨੂੰ ਉੱਥੇ ਬੇਬੁਖਾਂ ਰੂ ਇਹ ਇਹ ਕੰਨ ਵਾਲੇ ਰੂਪ ਦੇ ਵਿੱਚ ਹਾਂਜੀ ਢੜ ਢੜ ਇਹਦਾ ਜੀ ਐਸੋ ਜਿਹੜਾ ਭੇਖ ਵਾਲੇ ਲੋਕ ਦੇ ਇਹਨੂੰ ਢਾੜਨਾ ਕੀਤਾ ਵਾਸਤੇ ਕਰਦੇ ਹਾਂ ਦੀ ਸ਼ੁੱਧਤਾ ਚਾਹੀਦੀ ਹੈ ਉਸ ਦਾ ਗਿਆਨ ਤੇ ਵੀ ਸ਼ੁੱਧਤਾ ਚਾਹੀਦੀ ਹੈ। ਸ੍ਰੀ ਦੀ ਵੀ ਸ਼ੁੱਧਤਾ ਚਾਹੀਦੀ ਹੈ। ਹਾਂ। ਇਹ ਤਾਂ ਰ ਵੀ ਬੜਾ ਸ਼ੁੱਧਤਾ ਨੂੰ ਪਸੰਦ ਕਰਦਾ ਹੈ। ਪ੍ਰਸੰਤਾ ਦੇ ਬਿੱਚ ਉਹਦਾ ਵਿਚਾਰ ਧਾਰਾ ਵੀ ਬੇਹਦ ਕੋ। ਜਦ ਹੋਈ ਤੇ ਨੂੰ। ਜਿਹੜੇ ਨਾਲ ਹੋਰ ਸੰਤਾਈ ਸੀ। ਹੋਰ ਸੰਤ ਵੀ ਹੁੰਦੀ ਸੀ। ਅੱਛਾ ਜੀ। ਉਹ ਨਾਲ ਹੋਰ ਵੀ ਦਾਸ ਸਾਧ ਵੀ ਜੁੜੇ ਉਹਨੂੰ ਵਾਲੇ ਹੁੰਦੇ ਸੀ। ਮਗਰ ਭੀੜ ਇਕੱਠੀ ਕਰ ਦਿੰਦੇ ਸੀ ਦੂਏ ਕਰ ਸੀ ਭੀੜ ਇਕੱਠੀ ਉਹਦੇ ਠੀਕ ਹੈ ਜਿਵੇਂ ਸੋਤਰਾ ਉਹਦੇ ਆ ਜਾਂਦੇ ਸੀ ਹਾਂਜੀ ਔਲੀ ਪੁਲਤੀ ਫਾਵਾ ਹੋਇ ਕੇ ਹਾਂਜੀ ਘਰ ਆਇਆ ਪੌਲੀ ਜੁੱਤੀਆਂ ਪਈਆਂ ਉੱਥੇ ਹਾਂ ਹਾਂ ਔਲੀ ਜੁੱਤੀ ਗੁਰਬਾਹ ਲਈ ਆਖਿਆ ਕੋਈ ਦੀ ਗੱਲ ਉਹਨਾਂ ਦੇ ਪੱਲੇ ਸੀ ਉਹ ਕਰ ਸੀ ਉਹ ਕਿਉਂ ਕਰ ਰਹੇ ਸੀ ਕਿਉਂਕਿ ਜੋ ਜਵਾਬ ਨਹੀਂ ਸੀ ਕੋਈ ਸਹੀ ਸੀ ਵੀ ਜੇਰਾ ਦੇ ਵਿੱਚ ਕੋਈ ਲਾਹਾ ਹੈ ਕਿਸੇ ਗ੍ਰੰਥ ਮੁਤਾਬਕ ਦੱਸੋ ਕੋਈ ਲਾਹਾ ਹੈ ਬਾਈਬਲ ਮੁਤਾਬਕ ਦੱਸੋ ਕੁਰਾਨ ਮੁਤਾਬਕ ਦੱਸੋ ਉਹ ਤੇ ਜੀਵਨ ਦਾ ਛਾਸਰ ਬੁਟਾਵਕ ਦੱਸੋ ਵੇਦ ਬੁਟਾਵਕ ਦੱਸੋ ਕੋਈ ਦਰਖਤ ਦਾ ਹੈ ਵੀ ਇਹ ਕੰਮ ਕਰਦੇ ਤੂੰ ਸਿੱਕੇ ਆਪਣੇ ਆਪੇ ਆਪਣੀ ਫਰਜ਼ੀ ਨਾਲ ਠੀਕ ਹੈ ਕੱਲੇ ਹੋ ਗਏ ਠੀਕ ਉਹ ਘਰ ਕਿਤਰ ਕਾਗੇ ਘਰ ਨੂੰ ਆ ਗਿਆ ਉੱਠ ਕੇ ਸਾਡੇ ਦੇ ਫਰੀਦ ਫਰੀਦ ਕੋਈ ਨਾਲ ਦਾ ਆਜਮਾ ਵੀ ਨਹੀਂ ਕੁੜਮੀ ਵੇਮੁਖ ਰਲਣਾ ਨਾ ਮਿਲੇ ਤਾਂ ਬਹੁਤੀ ਫਿਰ ਆਣ ਘਰ ਪਾਇਆ। ਅੱਗੇ ਸੰਭ ਕੋਨੇ ਤਾਂ ਉਹਨੂੰ ਉਹ ਲਾਇਆ। ਹੂੰ ਕੁੜਮੀ ਜਿਹੜੇ ਹੋਰ ਰਿਸ਼ਤੇਦਾਰੀਆਂ ਦੇ ਵਿੱਚ ਕਿਹਾ ਮੈਂ ਤਿਆਗਦਾ ਕਿਉਂਦਾ ਸੀ ਵਿੱਚ ਸੰਤਰ ਦੇ ਸੀ ਨਹੀਂ ਰਲਾ ਸਕਦੇ ਅੱਛਾ ਬੋਟੀ ਆਪਣੀ ਮਾਤ ਛੱਡਣੀ ਪਈ ਅੱਛਾ ਜੀ ਉਹ ਕਹਿੰਦੇ ਸਕਦਾ ਅੱਛਾ ਜੀ ਵੋਟੀ ਪਤੀ ਤੇ ਜੀਰੋ ਕੀ ਭਾਵ ਹੈ ਜੀ ਵੀ ਨਾਲ ਦੇ ਬੁੱਢੇ ਦੀ ਮਤ ਹੁੰਦੀ ਹੈ ਅੱਛਾ ਜੀ ਭਈ ਗੁਰ ਕੀ ਮੱਤ ਲੈਣੀ ਹੈ ਜਾ ਜੀ ਬਣ ਕੇ ਆ ਜਾ ਠੀਕ ਹੈ ਹਾਲਤ ਪਲਤ ਦੁਵੇਂ ਗਏ ਨਿਤ ਭੁੱਖਾ ਕੂਕੇ ਧਿਆਇਆ ਤਨ ਤਨ ਸੁਆਮੀ ਕਰਤਾ ਪੁਰਖ ਹੈ ਜਿਨਿ ਨਿਯਾਉ ਸਚ ਬਹਿ ਆਪ ਕਰਾਇਆ ਹਾਲਤ ਪਲਤ ਦੁਵੇਂ ਗਏ ਆ ਲੋਕ ਵੀ ਜਿਆ ਫਲੋਕ ਲੋਕ ਮਿਲਿਆ ਤਾਂ ਫਲੋਕ ਦਾ ਗਿਆਨ ਲੋਕ ਆ ਲੋਕ ਚ ਬੋਲਤਾ ਵੀ ਨਹੀਂ ਕੂਕੇ ਕੁੱਖਾ ਤੇ ਆਇਆ ਕੁੱਖਾ ਤੇ ਆਇਆ ਕੂਕ ਰਹਿ ਠੀਕ ਤਾਂ ਤਾਂ ਸੋਮੀ ਘਰ ਦਾ ਪੁਰਖ ਹੈ ਇਹੋ ਆਪ ਤਰਾਇਆ ਬੈਠ ਕੇ ਹੋਰ ਵਿਖਾੜ ਕੇ ਸੱਚ ਦਾ ਦਿਉ ਸਮਝਾਇਆ ਸੱਚ ਸਮਝਾਇਆ ਰਸਤਾ ਨਹੀਂ ਨਹੀਂ ਸਹੀ ਰਸਤਾ ਠੀਕ ਹੈ ਔਰ ਸਹੀ ਰਸਤਾ ਗੁਰਮੁਖ ਦਾ ਰਸਤਾ ਠੀਕ ਹੈ ਸਾਬ ਦੱਸਿਆ ਹੂੰ ਹੂੰ ਠੀਕ ਹੈ ਕਿ ਕਿਉਂ ਇਸਾ ਕਿਤੇ ਬੜਾ ਇੱਕ ਵੱਖ ਕੱਢੇ ਕਚਮਾਲਿਆ ਹੂੰ ਕਾਲੇ ਰੋਸ਼ਕ ਚਾਲਿਆ ਤੇ ਨਾਏ ਰਸਤੇ ਸੇ ਜੁੜ ਹਾਰ ਗਏ ਵਾਲਿਆ ਲਿਖ ਲੋ ਮੈਂ ਤਰਬ ਬਹਾਲਿਆ ਇਹ ਉਪਦੇਸ਼ ਦਿੱਤਾ ਠੀਕ ਜੋ ਨਿੰਦਾ ਕਰੇ ਸਤਗੁਰੂ ਪੂਰੇ ਕੀ ਸੋ ਸੱਚੇ ਮਾਰ ਪਚਾਇਆ ਇਹ ਅੱਖਰ ਸਭ ਉਪਾਇਆ ਉਹਨਾਂ ਕਹਤਾ ਕਿਸੇ ਦੀ ਵੀ ਕਰੇ ਜਹੇ ਪੂਰੇ ਸਤਗੁਰ ਕੀ ਠੀਕ ਹੈ ਕੀ ਕੀ ਸੋ ਤੇਰੀ ਮਾਰੀ ਮਾਰਦੀ ਮੱਤ ਸੀ ਐਸੀ ਮਾਰ ਮਾਰੀ ਉਹ ਮੱਤ ਵੀ ਮਾਰੀ ਗਈ ਜਿਹੜਾ ਲੋਕਾਂ ਕੋਲ ਦੋ ਗੱਲਾਂ ਕਰਦਾ ਦਾ ਭੁੱਲ ਗਿਆ ਹੂੰ ਹੂੰ ਫਿਰਦਾ ਸੀਦਾ ਉਹਨੂੰ ਗੁਰੂ ਦੇ ਸਾਹਮਣੇ ਨਹੀਂ ਕਿਛ ਵੀ ਆਉੜਦੀ ਠੀਕ ਹੈ ਜੀ ਚੁੱਪ ਹੋ ਗਿਆ ਬੀਬੀ ਪਾਲੀ ਵਿਚਾਰਬੋਦਕ ਹੂੰ ਹੂੰ ਉਠਾ ਹੋ ਗਿਆ ਗੁਰਖ ਸਾਹਿਬ ਹੋ ਗਿਆ ਵਾਰ ਪਚਾਇਆ ਬਿਲਕੁਲ ਹੀ ਸਾਬਤ ਕਰਤਾ ਵੀ ਅਗੱdie ਇਹ ਇਹ ਆਖਿਆ ਇਹਨਾਂ ਜਗਤ ਸਭ ਉਪਾਇਆ ਇਹ ਕਹਿੰਦੇ ਬਾਈ ਗੱਲ ਅਸੀਂ ਵੀ ਹੱਕ ਚ ਅੱਖਰ ਉਹਨੇ ਆਖਿਆ ਜਿਹਨੇ ਸਾਰਾ ਸੰਸਾਰ ਪੈਦਾ ਕੀਤਾ ਆਪਣੇ ਨੂੰ ਤੇਰੀ ਲਈ ਗੱਲ ਆਪਣੇ ਹੱਕ ਚ ਗੁਰੂ ਘਰ ਦੇ ਹੱਕ ਚੱਲ ਅਵੇ ਅਖਰ ਨਹੀਂ ਆਪ ਕਹੇ ਹਮ ਹਮ ਦੇ ਆਪ ਅਖਰ ਨੂੰ ਨੂੰ ਕਹਿਆ ਇਹ ਜੋ ਇਹ ਉਹ ਕਹਿ ਰਹੇ ਅਸੀਂ ਅਸੀਂ ਆਪਣੇ ਕੋਲੋਂ ਕੁਝ ਨਹੀਂ ਕਿਹਾ ਤੁਹਾਨੂੰ ਪੁੱਛਣੀ ਸੀ ਪੈਰ ਵਿਰੋਧ ਨਹੀਂ ਸੀ ਉਹਦੇ ਨਾਲ ਪਰ ਕਰਤੇਪੁਰਖ ਦੀ ਵਿਚਾਰਧਾਰਾ ਨਾਲ ਵਿਰੋਧ ਹੋਣ ਕਰਕੇ ਕਰਤੇਪੁਰਖ ਨੇ ਖੁਦ ਹੀ ਉਹਨੂੰ ਪੜਦੀ ਕੀਤੀ ਉਹਦੇ ਦਰਜ ਕਰਵਾਏ ਗਏ ਇਹ ਜਿਹੜਾ ਸਾਰਾ ਜਗਤ ਪੈਦਾ ਕੀਤਾ ਉਹਦੇ ਦੇ ਵਾਸਤੇ ਸਿੱਖ ਇਹ ਹਰੂਨ ਵੀ ਖਰਾਬ ਕਰੂਗਾ ਮਹੱਲਾ ਚੌਥਾ ਸਾਹਿਬ ਜਿਸ ਕਾ ਨੰਗਾ ਭੁੱਖਾ ਹੋਵੇ ਕਿਸ ਕਾ ਨਫਰ ਕਿੱਥੋਂ ਰੱਜ ਖਾਏ ਜੇ ਸਾਹਿਬ ਕੈ ਘਰ ਸੋ ਨਫਰੇ ਹੱਥ ਆਵੇ ਅਣ ਹੁੰਦੀ ਪਾਏ ਸਾਹਿਬ ਜੀ ਦਾ ਸਾਹਿਬੇ ਦੁੱਧਾ ਭੁੱਖਾ ਹੋਵੇ ਹਾਂਜੀ ਉਹਦਾ ਜੇਲਾ ਕਿਥੋਂ ਰੱਜ ਕੇ ਖਾ ਸਕਦਾ ਹੈ ਇਹ ਜਿਹੜੇ ਲੋਗ ਨੇ ਜਿਹਦਾ ਸਾਹਿਬ ਦੁੱਧਾ ਭੁੱਖਾ ਹੈ ਦੁੱਧਾ ਭੁੱਖਾ ਸਾਹਿਬ ਵਾਲਾ ਹੈ ਫਿਰ ਜਿਹੜਾ ਕੁਝ ਖੰਡ ਬਾਲ ਫਿਰਦਾ ਹੈ ਜਿਹਦਾ ਸਾਹਿਬ ਦੁੱਧਾ ਭੁੱਖਾ ਹੈ ਉਹਦੀ ਇਹਨੂੰ ਇਹਦਾ ਚੀਜ਼ਾਂ ਹਟਦੀ ਕੀ ਲੋੜ ਹੈ ਇਹਦਾ ਸਾਹਿਬ ਦੁੱਧਾ ਭੁੱਖਾ ਕੋਈ ਜਦ ਐ ਭੁੱਖਾ ਸਾਹਿਬ ਆ ਰਹਾ ਹੈ ਸਾਹਿਬ ਜਿਸ ਦਾ ਦੰਦਾ ਭੁੱਖਾ ਹੋਵੇ ਤੇ ਸਾਹਿਬ ਤੁਸੀ ਭਾਬ ਬਣਦਾ ਜੀ ਸਾਹਿਬ ਜਿਹਦੀ ਭਗਤੀ ਕਰਦਾ ਉਹ ਸਾਹਿਬ ਹੈ ਉਹਦਾ ਅੱਛਾ ਉਹਦੇ ਕੋਲ ਗਿਆਨ ਨਹੀਂ ਹੈ ਕਿਤਾ ਬੁਰਦਾ ਸਾਹਿਬ ਹੈ ਜੀ ਆਪ ਤਾਂ ਵੱਡਾ ਬੁਰਦਾ ਜੀ ਦੀ ਭਗਤੀ ਕਰਦਾ ਉਹੀ ਸਾਹਿਬ ਹੋਗਾ ਹਾਂਜੀ ਉਹੀ ਦੰਦਾ ਭੁੱਖਾ ਹੋਵੇ ਇਸ ਦਾ ਨਫਰ ਕਿੱਥੋਂ ਆ ਦੇਖਾਏ ਉਹਦਾ ਜਿਹੜਾ ਚੇੜਨਾ ਉਹਦਾ ਜਿਹੜਾ ਕਿੱਥੋਂ ਆਵੇ ਜੇ ਸਾਹਿਬ ਦੇਦਰ ਵਾਟ ਹੋਵੇ ਸੋ ਨਫਰੇ ਹੱਥ ਆਵੇ ਜੇ ਸਾਹਿਬ ਕੋਈ ਵਸਤੂ ਹੋਵੇ ਉਹੀ ਉਹਦੇ ਜਿਹਨੇ ਨੂੰ ਮਿਲਣੀ ਦਫਰੇ ਨੂੰ ਮਿਲਣੀ ਹੋਈ ਆਤਾਂ ਦੀ ਜੇ ਚੜਾਵਾ ਚੱਲਣਾ ਪੀਰ ਕਾਦੇ ਉਹੀ ਉਹਨਾਂ ਨੂੰ ਮਿਲਣਾ ਠੀਕ ਹੈ ਪਰ ਇਹ ਗਿਆਨ ਪੱਖੋਂ ਵੀ ਗੱਲ ਕਹੀ ਹੈ ਵਿੱਚ ਜਾਣ ਹੀ ਨਹੀਂ ਹੈ ਉਹਨੂੰ ਫਿਰ ਉਹ ਗਾਹ ਕੀ ਦਊਗਾ ਗਿਆਨ ਹਾਂ ਹਾਂ ਦੋਇਦਲਾਂ ਆ ਗਈਆਂ ਗੱਲ ਤਾਂ ਗਿਆਨ ਪੱਖੋਂ ਆ ਠੀਕ ਹੈ ਜੀ ਸੰਸਾਰੀ ਤੌਰ ਤੇ ਖਾਦਦਾ ਨਾ ਜਿਹੜਾ ਮਾਲ ਹੈ ਸੰਸਾਰੀ ਤੌਰ ਤੇ ਵੀ ਗੱਲ ਤਾਂ ਲਈ ਹੈ ਜੀ ਲੰਗਰ ਚੱਲਦੇ ਨੇ ਤਾਂ ਰੰਦਾ ਜਾਂਦਾ ਕੁੱਤੇ ਵੀ ਨੇ ਜਿੱਕੇ ਜਾਂਦੇ ਨੇ ਹਾਂ ਉਹਦੇ ਮੁਦਦਲੇ ਮੁਦਦਲੇ ਜੁਦੜ ਕਲਦੇ ਨੇ ਬੇਰ ਸਮਾਇਆ ਹੈ ਸਾਹਿਬ ਨੂੰ ਤਾਂ ਭੁਖਾ ਦੀਏ ਉੱਥੇ ਹਾਂ ਹਾਂ ਇਹਦਾ ਸਾਹਿਬ ਨੂੰ ਤਾਂ ਪਹਿਲਾ ਸੇਵਾ ਕੀਤੀ ਫਿਰ ਉਹਨੇ ਲੇਖਾ ਦੋ ਜੇ ਸੇਵਾ ਦਾ ਹਾਂ ਹਾਂ ਸੇਵਾ ਔਖੀ ਹੋਈ ਉਹ ਸੇਵਾ ਸੁਖ ਦੇਣ ਵਾਲੀ ਤੇ ਹੁੰਦੀ ਠੀਕ ਹੈ ਉਹ ਜਦੋਂ ਬਦੀ ਮਹਿਣਾ ਸੇਵਾ ਚਲਤਾਂ ਹਾਂ ਹਾਂ ਉਹ ਤਾਂ ਸੇਵਾ ਸੰਸਾਰੀ ਹੈ ਠੀਕ ਹੈ ਸੇਵਾ ਉਹਦੇ ਨੂੰ ਸੋਖਾ ਜੀ ਹੁੰਦਾ ਦਰਗ ਸੇਵਾ ਕਰੋ ਹਰ ਕੋਰ ਸਫਰ ਦਾ ਕੀ ਫਿਰ ਲੇਖਾ ਬੁਨੇ ਕੋਈ ਤੇ ਕਰਕੇ ਤੁਸੀਂ ਐਸੀ ਸੇਵਾ ਕਰੋ ਜਿਹਦੇ ਚੋਂ ਸਭਨ ਦਾ ਪੂਰਵਕ ਆਤਮ ਦਰਸ਼ਨ ਹੋ ਜਵੇ ਆਤਮ ਦਰਸ਼ਨ ਕਰ ਬਿਕੇ ਆਤਮ ਦਰਸ਼ਨ ਦੇ ਬਿਕੇ ਸਭਲ ਸਭਨ ਪ੍ਰਾਪਤ ਹੋ ਜੀਵੇ ਤੁਹਾਨੂੰ ਠੀਕ ਜੀ ਆਤਮਾ ਦਾ ਦਰਸ਼ਨ ਕਰ ਸਕੋ ਆਪਣੇ ਦੇਹਕਾਰੀ ਸਰੂਪ ਦਾ ਦਰਸ਼ਨ ਕਰ ਸਕੋ ਔਰ ਵਾਕਿਆ ਹੀ ਕਰ ਲਵਾਂਗਾ ਸਫਲ ਹੋ ਜਵਾਂਗਾ ਕਰੂੰ ਉਹ ਸੇਵਾ ਕਰੋ ਓ ਕੀ ਸੇਵਾ ਗੁਰ ਸ਼ਬਦ ਵਿਚਾਰ ਮਿਹਰਬਾਨੀ ਵਿਚਾਰ ਗੁਰਮਹਾਰੀ ਨੂੰ ਵਿਚਾਰੋ ਇੱਚੋ ਸਫਲ ਦਰਸ਼ਨ ਲਵਾਂਗਾ ਤੇ ਇੱਕ ਆਤਮ ਦਰਸ਼ਨ ਹੋਊਗਾ ਠੀਕ ਹੈ ਜੀ ਇਹ ਕਰੋ ਹੋ ਜੀ ਨਾਨਕ विचार है ਜਨ ਚਾਰ चार वेद कहंदे भगत मुख है ते बोलदे से वचन होबिंदे ओबक ने क्या रल संत जन चार, कहं तो तो संत चार वेद कहंदे हां जी गाना ते संत जन ਸੰਸਤਾ ਜੀ ਨਾਲ ਇਹ ਵਿਚਾਰਿਆ ਇਹ ਆ ਵਿਚਾਰਦੇ ਨੇ ਸੁਸਤ ਜਾਨਾ ਵਿਚਾਰਦੇ ਨੇ ਕਿਉਂ ਚਾਰ ਵੇਦ ਕਹਿੰਦੇ ਨੇ ਉਹੀ ਵਿਚਾਰਦੇ ਨੇ ਸੰਸਤਾ ਦੇ ਜੋ ਵਿਚਾਰਾ ਸੰਸਤਾ ਦੇ ਵਿਚਾਰ ਉਹ ਪਾ ਰਿਹਾ ਜੋ ਚਾਰ ਵੇਦ ਕਹਿੰਦੇ ਨੇ ਉਹੀ ਵਿਚਾਰਦਾ ਹੈ ਚਾਰ ਵੇਦ ਕਹਿੰਦੇ ਠੀਕ ਹੈ ਸੰਸਾਰ ਦੇ ਵਿੱਚ ਲੋੜ ਆ ਚੰ ਵੇਦਾਂ ਦੀ ਸਾਰੀ ਯੂਨੀਵਰਸ ਦੀ ਲੋੜ ਆ ਗਿਆ ਅੰਦਰ। ਚੌਥਾ ਆਤਮਦਰਸ਼ਣ ਦਾ ਜਿਹੜਾ ਵੇਦ ਹੈ ਉਹ ਪੂਰੀ ਤਰ੍ਹਾਂ ਦੱਸਦਾ ਹੈ। ਤਿੰਨ ਵੇਦ ਪਵਿੱਤਰ ਪਵਿੱਤਰ ਪਵਿੱਤਰ ਤੱਕ ਲੈ ਕੇ ਜਾਂਦੇ ਨੇ। ਪਵਿੱਤਰ ਪਵਿੱਤਰ ਪਵਿੱਤਰ ਇਹ ਜਿਹੜੇ ਕਰਦੇ ਨੇ ਤਿੰਨ ਵੇਦ। ਠੀਕ ਹੈ। ਆਤਮਾ ਉਹ ਪਵਿੱਤਰ ਕਰਤੀ। ਸਿਰ ਹੋਰ ਬਵਿੱਤਰ ਸੀ ਸਿਰ ਹੋਰ ਬਵਿੱਤਰ ਕੀਤੀ ਗੁੱਡ ਬੈਟਰ ਵੈਸਟ ਅੱਛਾ ਵੈਸਟ ਪਵਿੱਤਰ ਹੋ ਗਈ ਹੂੰ ਹੂੰ ਜੇ ਕੋਡ ਬੈਟਰ ਵੈਸਟ ਆਲੋ ਤੇਨੇ ਭੌਰਵਾ ਦੇ ਵਿੱਚ ਪਵਿੱਤਰ ਹੋ ਗਈ ਪਵਿੱਤਰ ਦੇ ਬਾਅਦ ਰਾਹ ਚੱਕਿਆ ਜਾਂ ਸਰੀਰ ਤੋਂ ਛੁੱਟਿਆ ਤੇ ਕੁੱਲੀ ਛੁੱਟੀ ਦਸਵਾ ਦਵਾਰ ਖੁੱਲਿਆ ਪਵਿੱਤ ਹੋ ਗਿਆ ਸ਼ਬਦ ਗੁਰੂ ਜਲੀਦ ਹੋ ਗਿਆ ਪਵਿੱਤਰ ਪਵਿੱਤਰ ਪਵਿੱਤਰ ਪੁਰੀਤ ਇਹ ਚੌਥਾ ਬੇਅ ਹੈਗਾ ਚੌਥੇ ਬੇਅ ਦੇ ਵਿਚਾਰੇ ਤੇਰਾ ਘਰ ਹੋ ਗਿਆ ਤੇਰਾ ਘਰ ਚਲੀਦ ਹੋ ਖਜ਼ਾਨੇ ਚ ਪੈ ਗਿਆ ਹਾਂਜੀ ਠੀਕ ਹੈ ਜੀ ਭਗਤ ਮੁਖ ਬੋਲਦੇ ਸੇਵ ਵਚਨ ਹੋਵੰਦੇ ਦੇ ਦੇਖੋ ਨੇ ਭਗਤ ਬੋਲਦੇ ਨੇ ਠੀਕ ਹੈ ਜੀ ਕਦ ਵਿਚਾਰਦਾ ਸੰਤ ਹੈ ਭੌਤ ਨਹੀਂ ਹੈ ਗੁਰੂ ਪੌਣੀ ਭਗਤਾਂ ਨੇ ਇਹ ਬੋਲੇ ਭਗਤ ਨੇ ਵਿਚਾਰਿਆ ਸੰਤਾਂ ਦੇ ਜਿਨ੍ਹਾਂ ਜਰ ਵਿਚਾਰਦਾ ਹੈ ਕਬੀਰ ਸੰਤ ਹੈ ਕਥਨ ਕੀਤਾ ਗੁਰवाणी ਬੋਲੀਏ ਫਿਰ ਭਗਤ ਫਿਰ ਸਤਰੀ ਹੈ ਫਿਰ ਉੱਪਰ ਜਿਹੀ ਕੋਦੋਂ ਭਗਤ ਮੁਖੇਤੇ ਬੋਲਦੇ ਸੇ ਬਚਨਾ ਹੋਵਨ ਜੋ ਉਹ ਕੋ ਬੋਲਦੇ ਨੇ ਉਹ ਤਾਂ ਇੱਥੇ ਉੱਥੇ ਸੱਚ ਹੈ ਦਾਸ ਕਹਿੰਦਾ ਧੰਨ ਦਾਸ ਮੁਖਤ ਦਾਸ ਅੱਛਾ ਪਰਮੇਸ਼ਰ ਦਾਸ ਬਣ ਕੇ ਜਿਹੜਾ ਬੋਲਦਾ ਪਰਮੇਸ਼ਰ ਦਾਸ ਜੋ ਬੋਲਦਾ ਦਾਸ ਮੁਖ ਤੇ ਜੋ ਬੋਲ ਲਿਆ ਉਹ ਸੱਚ ਹੋ ਗਏ ਉਹ ਤਾਂ ਐਸ ਲੋਕ ਦੀ ਵੀ ਸੱਚ ਹੈ ਪਰ ਲੋਕ ਵੀ ਸੱਚ ਹੈ ਉਹੀ ਦਾ ਵਜਨ ਹੁੰਦੇ ਨੇ ਹਰ ਦਰਗਾਹ ਦੀਆਂ ਬਾਤਾਂ ਨਾਨਕ ਆਖ ਸੁਣਾਵੇ। ਇਹ ਤਾਂ ਹਰ ਦਰਗਾਹ ਦੀਆਂ ਬਾਤਾਂ ਵੀ ਜਿਹੜੇ ਸੁਣਾ ਰਹੇ ਨੇ। ਉਹ ਤਾਂ ਵਜਨ ਹੋ ਰਹੀ ਨੇ ਉਹੀ ਤਾਂ ਹੁਕਮ ਹੈ। ਉਹ ਹੁਕਮ ਹੈ ਹੁਕਮदाई ਕਰ ਰਹੇ ਨੇ ਦਰਗਹ ਨਾਮ ਬਖਾਣਾ ਹੈ। ਹੁਕਮ ਹੈ ਪਾਣੂ ਵਰਤੈ ਜੋ ਵਰਤੈ ਹੈ ਉਹ ਕਹਿ ਰਹੇ। ਜੋ ਕਹਿ ਰਹੇ ਨੇ ਉਹ ਵਰਤਿਆ ਹੈ ਜੋ ਵਰਤਿਆ ਹੈ ਉਹ ਕਹਿ ਰਹੇ। ਉਹ ਬਚਨ ਲੋ ਬੰਦੇ ਪ੍ਰਗਟ ਪਹਾਰਾ Japda ਸਭ ਲੋਕ ਸੁਣਨਦੇ ਸੁਖ ਨਾ ਪਾਇਨ ਮੁਗਦ ਨਰ ਖਾਂਦੇ ਪ੍ਰਗਟ ਪਹਾਰਾ Japda ਸਭ ਲੋਕ ਸੁਣਨਦੇ ਲੋਕਾਂ ਬਿਲਕੁਲ ਪ੍ਰਤੱਖ ਹੋ ਗਿਆ ਜੋ ਹੋ ਰਿਹਾ ਹੈ ਉਹੀ ਕਹਿ ਲਿਆ ਬਿਲਕੁਲ ਸੱਚ ਹੈ ਪਰਗਟ ਕਰਤੀ ਖੇਡ ਔਖ ਵੀਰ ਪਰਗਟ ਪਈ ਖੇਡ ਲੈ ਲੈ ਕੋ ਚੁੰਗਾ ਜਿਦ ਭੇਡ ਇਹ ਦੁਰਬੁੱਧ ਇਹ ਜਿਹੜੀ ਹੈਗੀ ਖਬੋਧਾ ਇਹ ਤਾਂ ਬੁੱਧੇ ਤੇ ਖੇਪੀ ਹੋਈ ਆ ਇਹ ਤਾਂ ਬੁੱਧੀ ਖੁਜੀ ਤੂੰ ਖੁਜੀ ਪੜਦੀ ਆ ਇਹ ਤਾਂ ਪੁੱਠੇ ਪਾਸੇ ਲੱਗੀ ਇਹ ਖੇਡ ਪਰਗਟ ਪਈ ਖੇਡ ਠੀਕ ਹੈ ਜੀ ਪਰਗਟ ਖੇਡ ਹੈ ਭਈ ਆ ਕਿ ਕਿਸ ਨੇ ਪੈਦਾ ਕੀਤੀ ਹੈ ਸ੍ਰਿਸ਼ਟੀ ਰਸੋ ਚ ਲੋ ਜਿਹੜੇ ਰਾਮਨਾਸ ਸ੍ਰਿਸ਼ਟੀ ਪੈਦਾ ਹੋ ਗਿਆ ਰਸੋ ਚ ਲੋ ਪਹਾਰਾ ਦਾ ਕੀ ਭਾਵ ਹੈ ਜਿਹੜੀ ਹੋਈ ਚੀਜ਼ ਸੀ ਨਾ ਪ੍ਰਗਟ ਹੋ ਗਈ ਜਾਣ ਹੋਏ ਕਿਹੜੇ ਪ੍ਰਗਟ ਹੋ ਗਈ ਪ੍ਰਤੱਖ ਦਿਖਣ ਲੱਗੀ ਜੋ ਕਾਹ ਨੂੰ ਗੱਲ ਵੀ ਜੋ ਨਾ ਰਿਖਾ ਇਹ ਤਾਂ ਹੋ ਰਹੀ ਹੈ ਇਹ ਤਾਂ ਸੱਚ ਹੈ ਠੀਕ ਹੈ ਹਾਂਜੀ ਸੁਖ ਨ ਪਾਇਨ ਮੁਗਧ ਨਾਰ ਸੰਤ ਨਾਲ ਖੰਦੇ ਸੁਖ ਨਾਰ ਸੁਖ ਨਹੀਂ ਪਾ ਸਕਦੇ ਜਿਹੜੇ ਸੰਤਾਂ ਸੰਤਾਂ ਦਾ ਵਿਰੋਧ ਕਰਦੇ ਨੇ ਖੇਦੇ ਨੇ ਸੰਤਾਂ ਨੂੰ ਸੰਤਾਂ ਨੂੰ ਖੈਰਾਈ ਕਰਦੇ ਉਹ ਜੋੜੀ ਕਰਦੇ ਨੇ ਸੰਤਾਂ ਨੂੰ ਗਲਤ ਨਿਤ ਕਰਨ ਦੀ ਕੋਸ਼ਿਸ਼ ਕਰਦੇ ਨੇ ਆਪਰੇ ਸੌਣੇ ਵਰਦੇ ਦੇ ਚਰਚਾ ਦਾ ਚਰਚਾ ਸੰਤਾਂ ਨੂੰ ਬਹੁਤ ਜਤਰਾਈ ਜਿਹੜੇ ਚਰਚਾ ਤੇ ਤੋਂ ਕਬ ਲੈ ਕੇ ਸੰਤਾਂ ਨਾਲ ਖੈਰ ਦੇ ਲੈ ਅੰਧ ਸੁੱਖ ਨਹੀਂ ਮਿਲੋ ਅੱਜ ਸਹੀ ਮਿਲਿਆ ਮੈਂ ਕਾਹ ਨੂੰ ਇਹ ਗੱਲ ਤਾਂ ਗੁਰੂ ਦੇ ਮੇਰੇ ਵੀ ਅਜ ਵੀ ਹੈਗੇ ਨੇ ਇਹ ਜੇ ਇਹ ਪੀੜੀ ਜਲਦੀ ਰਹੂਗੀ ਇਹ ਦੋ ਪੀੜੀਆਂ ਜਲਦੀਆਂ ਰਹਣਗੀਆਂ ਸੱਤਾ ਦੀ ਪੀੜੀ ਵੀ ਚੱਲੂਗੀ ਉਹਨਾਂ ਦੀ ਵੀ ਚੱਲੂਗੀ ਫਿਰ ਮੁਖਾਦੀ ਠੀਕ ਹੈ ਹੋਏ ਲੋਚਨ ਉਹਨਾਂ ਗੁਣੇ ਨੂੰ ਓਏ ਅਹੰਕਾਰ ਛੜੰਦੇ ਓਏ ਵਿਚਾਰੇ ਕੀ ਕਰੇਂ ਜਾ ਉਹ ਲੋਜਰਣਾ ਬਣਾਉਣਾ ਉਹਦੇ ਤੋਂ 19 ਗੋਣ ਨੇ ਉਹ ਜੇ ਸਾਡੀ ਵੀ ਬਹੁਤ ਤੌਜ ਗਏ ਅਸੀਂ ਵੀ ਫਿਰ ਮੁਝਾਂਦੀ ਹੋ ਗਈਏ ਨੇ ਅਰੇ ਆਹ ਕਿੱਥੋਂ ਗੋਣ ਠੀਕ ਹੈ ਉਹਦੇ ਵਾਰ ਨੇ ਬੇਬਾਲ ਤਾਂ ਹੈਂਦੀ ਬੈਰ ਬੁਰਾ ਤਦ ਹੋ ਜੀ ਕਦੋਂ ਪਾਗਲ ਬੁਧੇ ਨੇ ਪਾਗਲ ਹੋਈ ਦੇ ਨੇ ਤਾਂ ਪਾਗ ਬੰਦੇ ਦੇ ਉੱਥੇ ਪਾਸੇ ਲੱਗੇ ਹੋਏ ਦੇ ਗੁਲਬਾਵੇ ਹੋਈ ਨੂੰ ਸਕਦੇ ਇਹਨਾਂ ਗੁਣਾਂ ਦੇ ਧਾਰ ਵੀ ਕੀ ਹੋ ਸਕਦੇ ਬਰਾਬਰੀ ਕਰਦੀ ਚਾਹੁੰਦੇ ਨੇ ਮਿਹਰਬਾਨ ਬਰਾਬਰੀ ਕਰਦੀ ਚਾਹੁੰਦੇ ਗੁਰਬਾਣੀ ਲਿਖ ਰਿਹਾ ਹੈ ਕਿਵੇਂ ਬਰਾਬਰੀ ਕੀ ਹੈ ਨਾਲ ਮਿਹਰਬਾਨ ਦੀ ਹੈ ਚੱਲ ਰਹੀ ਹੈ ਗੁਪਤੀ ਤੌਰ ਤੇ ਹੇ ਗੇ ਜੋ ਮਾਰੇ ਤਿੰਨ ਪਾਰ ਸੇ ਕਿਸੇ ਨਾ ਸੰਦੇਹ ਵੈਰ ਕਰੇ ਨਿਰਵੈਰ ਨਾ ਧਰਮ ਨਿਆਏ ਪਛਾਨੇ ਜੇ ਉਹ ਨਾ ਜੇ ਉਹ ਪਾਲ ਬ੍ਰਹਮ ਮਾਰੇ ਉਹਨੂੰ ਪਾਰ ਬ੍ਰਹਮ ਦਾ ਮਾਰਿਆ ਹੋਇਆ ਧੱਕਿਆ ਹੋਇਆ ਵੀ ਕੋਈ ਸਾਬ ਸਕਦਾ ਔਰ ਰਵੈਰੇ ਨਾਲੇ ਫੈਰ ਕਰਦੇ ਕਰਮ ਵਾਲੇ ਜਿਹੜੇ ਨੇ ਹਾਂਜੀ ਉਹਨਾਂ ਦੇ ਤਾਂ ਫਿਰ ਤੁਰਲ ਪਾਗ ਬੰਦੇ ਦੇ ਤਰਮ ਦਾ ਉਹਨੂੰ ਪੀੜ ਦਿੰਦਾ ਘਾੜੀ ਚ ਰਾਜ ਹੈ ਦੇਵਤਾ ਅਸਲ जो जो संत ਸ਼ਰਾਪਿਆ ਸੇ ਫਿਰੇ ਭਵੰਦੇ ਪੇੜ ਮੁੰਡਾ ਹੋ ਕਟਿਆ ਤੇ ਇਸ ਡਾਲ ਸੁਗੰਧੇ ਹਸ ਕਹਿੰਦੇ ਜਿਹੜਾ ਜਿਹੜਾ ਸੱਤ ਦਾ ਸ਼ਰਾਪਿਆ ਗਿਆ ਸੰਤ ਸਿਰ ਆਪਿਆ ਉਹ ਕਹਿੰਦੇ ਬਸ ਸਮਝੋ ਜੰਗਲ ਵਰਤ ਪਿਆ ਰਹਿੰਦੇ ਅੱਛਾ ਜੀ ਇਹਦੇ ਉੱਤੇ ਫਲ ਫੁੱਲ ਸਭ ਸੁੱਕ ਜਾਂਦੇ। ਜੇ ਗੁਰਦਾਂ ਦੇ ਪੇੜ ਕਟਿਆ ਜਾਵੇ, ਉਹਦੇ ਉੱਤੇ ਜਿੱਕੇ ਬੋਟੇ, ਕਾਲੇ ਪੱਤੇ ਫੁੱਲ ਫਲ ਸਭ ਸੁੱਕ ਨੇ ਛੋਟੇ-ਬੋਟੇ ਜਿਹੇ। ਸਭ ਸੁੱਕ ਜਾਂਦੇ। ਹੂੰ। ਇਹ ਜਿਹੜਾ ਵਿਸਤਾਰ ਕਰੋਗੇ ਜੋ-ਜੋ ਸੰਤ ਸਰਾਪਿਆ ਸੀ ਕਿਉਂਕਿ ਸੰਤ ਕਹਿੰਦੇ ਆ ਵੀ ਸੰਤ ਸ਼ਰਾਪ ਦਿੰਦੇ ਆ ਫਿਰ ਐ ਹੁੰਦਾ ਉਹ ਇਸ ਗੱਲ ਦਾ ਫਾਇਦਾ ਉਠਾਉਂਦੇ ਆ ਫਿਰ ਆਪਿਆ ਲੱਗਦਾ ਸ਼ਰਾਪਿਆ ਦੀ ਅੱਛਾ ਜੀ ਸੰਤ ਤੇ ਹੋ ਗਿਆ ਮੈਂ ਇਹਨੂੰ ਉਂ ਕਰਕੇ ਇਹਦੀ ਇਹਦੀ ਮੈਂ ਮਿੱਟੀ ਬਲੀਦ ਕਰਕੇ ਛੱਡਣੀ ਸੰਤ ਸਾਰੀ ਤੋੜ ਕੇ ਛੱਡਣੀ ਅੱਛਾ ਜੀ ਨਾਲੇ ਸੰਤ ਦਾ ਜਨਮ ਲੈਂਦਾ ਉਹ ਜਿਹੜਾ ਉਹਦੇ ਆਪਣੇ ਅੰਦਰ ਸਾਥ ਹੈ ਨਾ ਉਹਦੇ ਆਪਣੇ ਉੱਤੇ ਸਾਥ ਨਾ ਉਹਨੂੰ ਹਟਾਉਂਦਾ ਵੀ ਤੂੰ ਇਹ ਕੰਮ ਨਾ ਕਰ ਉਹਦੀ ਅੰਦਰ ਆਤਮਾ ਨਹੀਂ ਚਾਹੁੰਦੀ ਇਹ ਕੰਮ ਉਹ ਕਰੇ ਪਰ ਉਹਦੇ ਸਿਰ ਛੱਡ ਕੇ ਉਹਦੀ ਮੰਨਦਾ ਨਹੀਂ ਹੈਗਾ ਆਪਣੀ ਉੱਤੇ ਆਤਮਾ ਵੀ ਮੰਨਦਾ ਉਹਨੇ ਖਰਾਬ ਦਿੱਤਾ ਹੋਇਆ ਉਹਦੀ ਅੰਦਰ ਆਤਮਾ ਵੀ ਮੈਂ ਕਹਾਂ ਜੇ ਤਰੀ ਮੰਨਦਾ ਲੈ ਲੈ ਫਾਹਾਂ ਉਹ ਜਿਹੜਾ ਬਾਹਰ ਸਰਦ ਦਾ ਹੁੰਦਾ ਹੀ ਨਹੀਂ ਸਾਥਨਾ ਜਨਮ ਨਹੀਂਦਾ ਹੀ ਨਹੀਂ ਅੱਛਾ ਉਹਦਾ ਨਿਰਵਾਣ ਆ ਫਿਰ ਬਾਹਰ ਨਾਲ ਤਾਂ ਉਹਦਾ ਦਿਲ ਨਾਲ ਪਿਆਰ ਕਰਦਾ ਅਰਥ ਕਰ ਲੈਣਾ ਦੇ ਅਸੀਂ ਨਿਰਵਾਣ ਤੋਂ ਗੁਰਮੁਖ ਨੂੰ ਉਹ ਨਹੀਂ ਬਿਰੋਧ ਕਰ ਸਕਦਾ ਉਹਦਾ ਫਿਰ ਬੁਰੇ ਦਾ ਵੀ ਭਲੇ ਕਰੂ ਇਹਦਾ ਵੀ ਭਲੇ ਕਰੂਗਾ ਸਹੀ ਸੋਚੂਗਾ ਠੀਕ ਹੈ ਉਹਦੇ ਵੀ ਦਰਸਤ ਸੁਤ ਹੈਗਾ ਜਿਹੜਾ ਆਪੇਰਾਪਿਆ ਹੋਇਆ ਹੈ ਉਹਦੇ ਦਰਪਰਤ ਰਾਤਵਾਂ ਨਹੀਂ ਆਪਣੀ ਉਸਤਰਾਤਵਾਂ ਨੂੰ ਕ੍ਰਸ਼ ਕਰਦੇ ਜਿਹੜਾ ਇਹ ਕੰਮ ਕਰਦਾ ਤੇ ਹੋਇਆ ਅੱਛਾ ਜੀ ਠੀਕ ਅੰਦਰ ਸੰਤ ਹੈ ਜਿਹੜਾ ਜਿਹੜਾ ਵੈਰ ਕਰ ਲਿਆ ਉਹਦੇ ਗੱਲ ਨਹੀਂ ਮੰਨਦਾ ਬੋਲਦਾ ਉਹ ਲੋਕ ਦਾ ਉਹਦੇ ਸਿਰ ਤੇ ਚੜ ਕੇ ਬੋਲਦਾ ਉਹ ਕਹਿੰਦਾ ਤੇਰੀ ਵੀ ਬੋਲਦਾ ਫਿਰ ਠੀਕ ਹੈ ਜੀ ਉਹ ਆਪਣੇ ਅੰਦਰ ਆਤਮਾ ਨੂੰ ਕ੍ਰੈਸ਼ ਕਰਕੇ ਬੋਲਦਾ ਉਹ ਆਪਣੇ ਅੰਦਰ ਆਉਣੀ ਚਾਹਦੀ ਉਹ ਇਹ ਕੰਮ ਕਰੇ ਉਹਦੀ ਠੀਕ ਹੈ ਆਪਣੇ ਮੂਲ ਨਾਲ ਝਗੜਾ ਆਪਣੇ ਅੰਦਰ ਦਾ ਠੀਕ ਹੈ ਜੀ ਝਗੜਾ ਤਾਂ ਸਵੰਦਰ ਦਾ ਨਾ ਭਾਸ਼ਾ ਦਾ ਨਾ ਬੁੱਧ ਦਾ ਬੁੱਧਰਵਾਜ ਦਾ ਨੀਜਾ ਕੜਾ ਦੋਏ ਬਣਾ ਦੋ ਸੰਜੀ ਗੰਧ ਕਰਕੇ ਦੇਖਾ ਬਣਾ ਲੜਦੇ ਹੋਏ ਹਾਂਜੀ ਲੜਦੇ ਨੇ ਠੀਕ ਹੈ ਜੀ ਜਿਹੜਾ ਹੈ ਆਪਣਾ ਵੈਰ ਕਰੇ ਨਿਰਵੈਰ ਨਾਲ ਧਰਮ ਨਾਇਏ ਪਚੰਦੇ ਵੀ ਮੂਲ ਨਾਲੇ ਵੈਰ ਕਰ ਰਿਹਾ ਆ ਨਿਰਵੈਰ ਨਾਲ ਵੈਰ ਕਰਦੇ ਠੀਕ ਹੈ ਜੀ ਉਹਦੇ ਆਪਣੇ ਦਾ ਲਾਭ ਜਾਣਦਾ ਨੂੰ ਉਹ ਨਾਲ ਵਾਰ ਕਰ ਲੈ ਉਹਦੀ ਜਾਣਦਾ ਹੂੰ ਹੂੰ ਉਹਨੂੰ ਕੋਈ ਪਤਾ ਨਹੀਂ ਜਦ ਜਾਲ ਮਾਰਨ ਦਾ ਤੰਗ ਕੋਲ ਤੰਗ ਉਹਨੂੰ ਕੋਈ ਨਹੀਂ ਪਤਾ ਪਲ ਕਰਦਾ ਉਹਨੂੰ ਪਤਾ ਜਦ ਤਨ ਫੜਿਆ ਹੋਊ ਜੀਅਰ ਦਾ ਠੀਕ ਹੈ ਜੀ